ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮੰਨ ਮੈਂ ਸਹੇ ਗੁਰਕੇ ਗ੍ਰਹਿ ਸੇਵਕ ਜੋ ਹੈ ਸਤਿਵੰਤ ਦਾ ਹੱਜੜਾ ਸਿਰਫ ਸੀ ਗੁਰੂ ਘਰ ਚ ਰਹਿੰਦੇ ਸੀ ਨਾ ਸੇਵਕ ਨੇ ਬੁੱਢਾ ਵੀ ਹੋਰ ਵੀ ਰਹਿੰਦੇ ਉਹਨਾਂ ਦੀ ਗੱਲ ਕਰ ਗੁਰਕੇ ਗ੍ਰਹਿ ਸੇਵਕ ਜੋ ਰਹੇ ਜੋ ਰਹੇ ਗੁਰ ਆਗਿਆ ਮੰਨ ਮੈਂ ਸਹੇ ਫਿਰ ਦਾ ਗੁਰ ਕਾ ਰਾਜ ਜਿਹੜਾ ਉਹ ਉਸੇ ਸੇਵਕ ਬਣ ਕੇ ਰਹਿਣ ਦਾ ਨੀ। ਦੋਇ ਗੱਲ ਨੇ ਸਤ ਗੁਰ ਤੇ ਖਾਲੀ ਕੋਈ ਨਹੀਂ। ਸਤ ਗੁਰ ਦਾ ਨਾਸਿਲ ਦੇ ਵਿੱਚ। ਜੇ ਮਨ ਤਰਕੁਣੀ ਛੱਡ ਕੇ ਹਿੱਤੇ ਜਨਮਾਸ ਚੱਲਵੇ ਸਤ ਗੁਰ ਦੇ ਘਰ ਚਲਾ ਜਾ। ਤੇ ਜੇ ਸਤ ਦੀ ਸੰਗਤ ਰੂਹ ਨੇ ਇਹ ਕੁਛ ਕਰਾਉਣਾ, ਇਹ ਕੁਛ ਦੱਸਣਾ ਵੀ ਭਾਈ ਐਂ ਕਰਦਾ। ਐ ਘੱਟ ਰਹੇ ਤੇ ਜਰਾ ਮੁਝੀ ਬਲਣਾ। ਆਪਣਾ ਘਰ ਬਦਲ। ਜਿੰਨਾ ਜਰ ਆਪਣਾ ਘਰ ਨਹੀਂ ਬਦਲਦਾ ਬਾਹਲੇ ਘਰ ਤੋਂ ਬੱਲੇ ਚ ਜਿਹੜਾ ਰਹਿੰਦਾ ਉਹ ਬਾਰ ਬਾਰ ਉੱਤੇ ਲਾਪੂਂ ਦੀ ਓਖਾ ਜੱਲੇ ਕਾ ਰਾਜ ਆ ਜਾ ਬਚਾ ਲੈ ਸਹ। ਫੁਰਕੇ ਗ੍ਰਾਸੇ ਫੁਰਕੇ ਜੋ ਗੁਰ ਕੀ ਆਗਿਆ ਮਨ ਮੈਂ ਸਹ ਗੁਰ ਕੀ ਆਗਿਆ ਮਨ ਦੀ ਆਵਾਜ਼ ਆਈ ੜੀ। ਮਨ ਕਰਕੇ क्या गुरका जो पढ़ना है परमेश्वर का जो है और बंदे से सह बर्दाश्त करे बर्दाश्त तो बाहर है ऐसे नहीं पहनती है दा बोझ बड़ा नहीं है सुन नहीं असल में सहना चोट मार दी है बहुत तकड़ी है वाणी चोट है सीधी चोट बर्दाश्त करे ਇਹ ਪਹਿਲੀ ਮਾਤਰ ਛਾਦੀ ਪੜ ਲੈਣੀ ਹੈ ਪਹਿਲੇ ਜੇ ਜਜ਼ੀਰੇ ਨਹੀਂ ਟੁੱਟਣੀ ਪਹਿਲਾਂ ਤਾਂ ਥੋੜਾ ਮਾਰੇ ਬੰਦ ਗਿਆ ਚੋੜ ਤੋਂ ਜਾਇ ਚੋੜ ਤੋਂ ਤਾਂ ਜਜ਼ੀਰੇ ਵੀ ਨਹੀਂ ਟੁੱਟਣੇ ਜੇ ਜੀ ਟੁੱਟਣ ਵਾਤੇ ਚੋੜ ਮਾਰਦੀਆਂ ਬਹੁਜੇ ਤੋੜਦੀ ਹੈ ਆਵਗੜ ਤੇ ਚੋੜ ਬਜੀ ਬਣਾਉ ਕੌਗੜ ਕੇ ਮੈਂ ਟੁੱਟੂ ਕੋਈ ਜਿਵੇਂ ਫੁੱਟੂ ਜਿਵੇਂ ਛੁੱਟੂ ਇਸ ਕਰਕੇ ਗੁਰ ਕੀ ਆਗਿਆ ਮੰਨਣਾ ਸਹ ਹੈ ਸੁਣੇ ਨਹੀਂ ਮੰਨਣੇ ਹੀ ਸਹੀ ਹੈ ਜੇ ਸਹੀ ਤਾਂ ਮੰਨ ਲਈ ਸਹੀ ਨੇ ਤਾਂ ਬੁੱਧੀ ਇਹ ਤਾਂ ਸਹ ਲਾਵੇ ਮੰਨਣ ਦੀ ਸਿਰ ਚੋਰਤਾ ਹੋਰ ਉਹ ਜਗਾ ਦੇਤੀ ਅੰਦਰ ਜਗਾ ਦੇਣੀ ਬਹੁ ਕੀ ਗੱਲ ਤੂੰ ਚਾਹ ਕਿੱਡੀਓ ਕੌੜੀ ਆ ਅੰਦਰ ਜਗਾ ਦੇਣੀ ਬਹੁ ਕੀ ਜੇ ਅੰਦਰ ਜਗਾਈ ਨਹੀਂ ਦਿੰਦੀ ਜੋ ਬਰਦਾਸ਼ਤ ਨਹੀਂ ਆ ਸੁਣ ਲਈ ਬਸ ਮਨਮਸਹ ਆਪਸ ਕੋ ਕਰ ਕ੍ਰਿਸ਼ਨ ਜਨਾਬਾ ਆਪਸ ਕੋ ਜਨਾਬਾ ਆਹ ਮੈਂ ਆ ਗਿਆ ਜਨਾਬਾ ਵੀ ਮੈਂ ਬਹੁਤ ਬੜਾ ਸਿੱਖ ਹੋ ਗਿਆ ਮੈਂ ਆ ਹੋ ਗਿਆ ਮੈਂ ਉਹ ਹੋ ਗਿਆ ਕੁੜੀ ਮੈਨੂੰ ਆਇਆ ਜੀ ਹੁਣ ਮੈਨੂੰ ਆਇਆ ਹੁਣ ਮੇਰਾ ਮਨ ਹੈ ਇਹ ਜੀ ਗੱਲ ਹੀ ਕਹੀ ਦੀ ਇੱਥੇ ਆਪਕੋ ਸਕੋਟ ਆਪਕੋ ਕਰ ਕੋਸਣਾ ਜਨਾਬਾ ਹਰ ਹਰ ਨਾਮ ਰਿਦੇ ਸ਼ੋਕ ਹੈ ਪਹਿਲੇ ਸਟੇਜ ਵਿੱਚ ਬੋਲਣ ਦੀ ਤਬੀਜ ਨਹੀਂ ਹੁੰਦੀ ਜੇ ਬੋਲਣ ਦੇ ਆ ਨਾ ਬੱਲੇ ਹੁੰਦਾ ਸੱਚ ਬੋਲਣ ਦਾ ਕਿ ਜਗਾ ਕੋ ਥੱਜ ਦੀ ਜਗਾ ਜਾਂਦਾ ਆਪਣੇ ਆਪ ਨੂੰ ਗਿਆਨਵਾਨ ਨਾ ਮੰਨ ਲਿਓ ਦੱਸਣ ਦੀ ਕੋਸ਼ਿਸ਼ ਕਰੇ ਸੰਗਤ ਵਿੱਚ ਬੈਠ ਕੇ ਆਪ ਜੀ ਵਿੱਚ ਜੇ ਸੰਗਤ ਹੁੰਦੀ ਹੈ ਉਹਨਾਂ ਦੇ ਵਿੱਚ ਇਹ ਜਿਹਾ ਪ੍ਰਭਾਵਨਾ ਪਾਉਣ ਲੱਗ ਜੇ ਮੈਂ ਗਿਆਨਵਾਨ ਹਾਂ ਤੁਹਾਡੇ ਸਾਰਿਆਂ ਨੂੰ ਹਰ ਕਿਸੇ ਨੂੰ ਜਨਾਬ ਹੈ ਲੋਕਾਂ ਉੱਤੇ ਪ੍ਰਭਾਵ ਪਾਉਣਾ ਤੇ ਬਹੁਤ ਆਪਣੇ ਗਿਆਨ ਦਾ ਕਰਕਜੁਣਾ ਜਣਾਵਾ ਹਰ ਨਾਮ ਰਿਦੇਸ਼ ਕੋ ਨਾ ਜਣਾਵਾ ਸੋ ਕੋ ਹਮਕਾਰ ਦੀਆਂ ਸੁਤੀ ਹੋ। ਉਹ ਕਿਦੋ ਹਵਾਵਾਂ ਦੇ ਹੁੰਦੀ ਆ ਥੋੜੀ ਜੀ ਉਹ ਥੋੜੀ ਜੀ ਹਵਾ ਉਹ ਤੋ ਭੰਪੜ ਬੰਚਦਾ ਹੁੰਦਾ ਜੇ ਹਵਾ ਮੰਨ ਕਰੀਏ ਨਾ। ਸੋ ਆफी ਜਲ ਕਰੀ। ਆਪ ਸੁਕੋ ਕਰਕਜੁਣਾ ਜਣਾਵਾ ਜਣਾਵਾ ਮੇਰਾ ਗਿਆਨ ਹੋ ਜਾਂਦਾ ਥੋੜਾ ਜਆ। ਉਹਦੇ ਹਮੇ ਜਾ ਸਕੀਏ। ਮੈਂ ਮੈਦਾ ਰੂਪ ਦਾ ਹਲਟਾ ਲੇਦਾ ਨਾ ਕਿ ਆ ਕੋਈ ਨਹੀਂ ਕਰ ਕਛੁਣਾ ਜਨਾਬਾ ਹਰ ਗਾਂ ਦਾ ਵਿਦੇਸ ਤਾਂ ਹੀ ਉਹ ਕਹਿੰਦਾ ਬਿਸ਼ੰਦੀ ਵਾਲੇ ਕਿ ਹਰ ਗਾਂ ਦੀ ਹੋਮੇ ਹੁੰਦੀ ਹੈ ਅਗਰ ਜਿਸ ਦੀ ਹੁੰਦੀ ਗੁਰਦਾਸ ਵਾਲੇ ਦੀ ਹੁੰਦੀ ਉਹ ਗੁਰਦਾਸ ਵਾਲੇ ਦਾ ਜਿਹੜਾ ਤੁਸੀਂ ਲਾਇਆ ਨਾ ਉੱਤੇ ਬੁਲਬੁਲਾ ਚੜਿਆ ਗੁਰਦਾਸ ਸਾਹਿਬਿਆ ਅੰਦਾਜ਼ ਜਿਹੜੀ ਹਿੰਦ ਚੜ੍ਹਦੀਆਂ ਨੇ ਕਸੂਰੀ ਤੇ ਉਹ ਹਿੰਦ ਦੀ ਸੁਮੈਲਾ ਤੁਹਾਡੇ ਉੱਪਰ ਐਸੀ ਕਸੂਰੀ ਤੁਝਿਲ ਬਹਿਂਦੀ ਹੁੰਦੀ ਹਿੰਦ ਸ਼ਿਰਕਾ ਗੁਰਦਾਸ ਦੀਆਂ ਬਾਹਾਂ ਰੇਈ ਤੋਂ ਹਿੰਦ ਦੀ ਗਈ ਕਸੂਰੀ ਗੰਧ ਉਹ ਕਸੂਰੀ ਵਾਲੀ ਗੰਧੇ ਚਲੀ ਤੁਹਾਡੇ ਕੋਲ ਵਰਮਾਤੀ ਤੋਂ ਇਹ ਬਿਲੋ ਕਿ ਆਜਣੀਆਂ ਜਿਹੜੇ ਵੀ ਗ੍ਰਹਣ ਤੇ ਸੂਰਜ ਪ੍ਰਕਾਸ਼ ਵਗੈਰਾ ਸਭ ਹੁੰਦੇ ਆ ਔਰ ਕੀ ਹੈ ਇਹ ਇੰਤਜ਼ਾਰ ਤੀਣਾ ਹੈ ਪੂਰੀ ਰਾਤ ਕੇ ਗੁਰਬਤਿ ਇਸਮਾਲ ਕਰੇਗਾ ਜੂ ਬਾਦ ਹਾਂਜੀ ਆਪਸ ਕੋ ਕਰ ਕਛੁਨਾ ਜਨਾਵਾ ਹੈ ਹਰ ਹਰ ਨਾਮ ਜਿਹਦੇ ਸਾਥ ਆਵੇ ਆਪਸ ਕੋ ਕਰ ਕਛੂਨਾ ਸੇਖਰ ਨੂੰ ਚਾਹੇ ਪਤਾ ਵੀ ਹੈ ਗਿਆਨ ਦਾ ਪਰ ਉਹ ਦੱਸਦਾ ਨਹੀਂ ਹੈ ਪੁੱਛਦਾ ਹੀ ਪੁੱਛਦਾ ਜੇ ਉਹ ਨੂੰ ਪਤਾ ਵੀ ਹੈ ਤਾਂ ਵੀ ਜਹਾ ਨਹੀਂ ਕਰਦਾ ਵੀ ਮੈਨੂੰ ਪਤਾ ਉਹ ਪੁੱਛਦਾ ਹੀ ਪੁੱਛਦਾ ਜੇ ਤਾਂ ਝੰਕਾ ਪੁੱਛਦਾ ਹੀ ਪੁੱਛਦਾ ਹਰ ਹਰ ਨਾਮ ਉਹਦੇ ਸਾਰਾ ਗਿਆਨ ਹੈ ਜੋ ਉਹਦਾ ਹੀ ਰਾਗ ਚੱਲਦਾ ਹੈ ਕਬੜ ਉਹਦਾ ਰਾਗ ਚੱਲਦਾ ਉਹਦੀ ਵਿਚਾਰ ਚੱਲਦੀ ਧਿਆਨ ਨਾਲ ਧਿਆਨ ਹਰ ਧਿਆਨ ਉਹਦੇ ਵਿੱਚ ਆਇਆ ਹਰ ਨਾਮ ਨੂੰ ਲਿਜੇ ਹਰ ਨਾਮ ਦੇ ਵਿੱਚ ਧਿਆਨ ਨਾਮ ਨੂੰ ਉਹ ਸੋਧ ਰਿਹਾ ਸੋਧ ਜਦ ਨਾਮ ਨੂੰ ਸੋਧ ਰਹੇ ਹੋਏ ਤਾਂ ਮੈਨੂੰ ਕਿੰਨਾ ਪਤਾ ਕਿੰਨਾ ਮੇਰਾ ਗਿਆਨ ਸੁਧਦਾ ਉਹਦੀ ਲੋੜ ਨਹੀਂ ਸਾਧੂ ਕਿੰਨਾ ਚੁੱਧਾ ਕਿੰਨਾ ਸੁਧ ਹੋ ਗਿਆ ਉਹਦੀ ਲੋੜ ਨਹੀਂ ਹੈ ਇਦੀ ਕਮੀ ਇਹਦੀ ਲੋੜ ਨਹੀਂ। ਇਦੀ ਕਮੀ ਉੱਥੇ ਨਹੀਂ ਚਾਹੀਦੀ। ਹਾਂ। ਸ਼ੁੱਧ ਕਿੰਨਾ ਹੋ ਗਿਆ ਇਹਦੀ ਬਿਲਕੁਲ ਕੋਈ ਲੋੜ ਨਹੀਂ। ਕਮੀ ਕਿੱਥੇ ਆਉਦੀ ਲੋੜ ਹੈ? ਧਿਆਨ ਨਾਲ। ਇਹ ਸ਼ੁੱਧ ਬਾਰੇ ਤਾਂ ਆਮ ਤਾਂ ਲੱਗਾ ਕبھی ਦਿਖੜੀ ਦੀ ਹੈ। ਕبھی ਦਿਖੜ ਤੇ ਹਟ ਜਾ। ਮਨ ਬੀਚੇ ਸਤਿਗੁਰੂ ਦੇ ਪਾਸ ਜਿਆਦਾ ਵੀ ਆਪਣੇ ਆਪ ਨੂੰ ਜੜੂ ਰੱਖਦੇ ਆ ਤੇ ਸ਼ੁੱਧੀ ਬੁਲਦੀ ਯਾਰ ਕਰਦੇ ਆ ਕਭੀ ਲੁਕੋ ਰਹੇ ਨੇ। ਕਭੀ ਤਾਂ ਕਮੀ ਬਲ ਧਿਆਨੀ ਸ਼ੁੱਧੀ ਬਲ ਧਿਆਨ। ਉਠਾ ਤਾਂ ਨ ਹੋ ਗਿਆ ਉਹ ਨੰਨੰਦਾਂ ਲੋਕੋ ਮੋਕੋ ਲੋਕੋ ਨੂੰ ਕੰਮੀ ਨੀ ਬੜੀ ਸ਼ਰਾਰਤ ਆ ਹਾਰਾ ਨਾਮ ਰਦੇ ਸਤਿਆਵਾ ਮਨ ਵਿੱਚ ਸਤਿਗੁਰ ਪਾਸ ਇਹਨਾਂ ਨੂੰ ਮੰਨ ਸਕਦੇ ਹਾਂ ਆਏ ਸ਼ਬਦ ਇਹ ਤਾਂ ਸ਼ਬਦ ਆਈਆਂ ਨੇ ਥੱਲੇ ਹੁਣ ਸ਼ਬਦਾਂ ਔਰ ਜੇ ਉਹ ਐਂ ਕਰਦਾ ਸਤਗੁਰ ਆਹ ਜਾਓਬੇ ਤਾਂ ਸਿੱਖ ਵੀ ਇਹ ਹੈ ਜਾਂ ਚਾਹੀਦਾ ਜੇ ਸਤਗੁਰ ਆਹ ਜਾਾਂ ਮਿਲ ਜੇਬੇ ਤਾਂ ਸਿੱਖ ਆਏਗਾ ਚਾਹੀਦਾ ਲਿਖਦਾ ਫਿਰ ਆ ਕਰਤਾ ਬਹਿ ਅਹ ਸਾਰੀ ਨੂੰ ਚਾਹਤਾ ਸਿੱਖੀਆਂ ਨੇ ਉਥੇ ਕੋਈ ਸਤ ਨਹੀਂ ਉਹ ਸਤਗੁਰ ਦਾ ਬਿਰਦ ਉਹ ਬਿਰਦ ਉਹ ਬਿਰਦ ਇਹਦੇ ਤੇ ਪਵੰਦੀ ਹੈ ਤੇ ਪਵੰਦ ਯਾਪ ਕੋ ਕਰ ਕਸ਼ਨਾ ਜਨਾਵਾ ਇਹ ਤੋਂ ਆਸ ਰੱਖੀ ਜਾਂਦੀ ਹੈ ਤੇ ਇਹ ਆਸ ਇਹ ਤੋਂ ਹੈ ਆਪ ਉਸ ਕੋ ਕਰ ਕਸ਼ਨਾ ਜਨਾਵਾ ਹਰ ਹਰ ਨਾਮ ਰਿਦੇ ਸਤਿ ਆਵੇ ਨਾਮ ਰਿਦੇ ਸਤਿ ਆਵੇ ਕੇ ਪਾਸ ਮਨ ਵਿੱਚ ਸਤਗੁਰੂ ਕੇ ਪਾਸ अपना मानदरा हैगा बिल्कुल सलेड रखे के नहीं हैगा सलाम का करे जवाब ना करे जे सलाम पर जवाब धोए करता है फमडों को था जाए जवाब नहीं कर सकता साधुदा उपदेश देते सत वचन योग 7 ਵਜੇ ਦਾ ਬਾਠ ਪੜਾਉਂਦੇ ਸੀ ਹਰੇਕ ਦਿਨ ਨੂੰ 7 ਵਜੇ ਦਾ ਨੀ ਸੀ। ਕੋਈ ਬੋਲੇ ਨਹੀਂ ਬੋਲ ਸਕਦਾ 7 ਵਜੇ ਕਰਨਾ। ਜਿਹੜਾ 7 ਤੇ ਆਵਾ ਬੋਲੀ ਦੂਆ ਸੀ ਨਾ ਰਹਿਣ ਦਿੰਦੇ ਸੀ ਬੁੱਢਾ। ਤਾਂ 7 ਉਹ ਗਾਇਆ ਮਨੁੱਖਾ ਨਹੀਂ 7 ਵਜੇ। ਜਾਣੋ ਚਲੋ। ਚੱਲ ਨਹੀਂ ਅੱਜ ਹਾਂ ਅੱਗੇ ਉਹ ਚੱਲਦਾ 7 ਵਜੇ। ਚੱਲ ਨਹੀਂ ਸਕਦਾ ਤੂੰ। ਮਨਵੇਚੇ ਸਤਗੁਰੂ ਦੇ ਪਾਸ ਇਸ ਸੇਵਕ ਕੇ ਕਾਰਜ ਰਾਸ ਮਨਵੇਚੇ ਸਤਗੁਰੂ ਦੇ ਪਾਸ ਮਨ ਸਤਗੁਰੂ ਦੇ ਪਾਸ ਬੈਠਣਾ ਚਾਹੁੰਦਾ ਵੇਚ ਕੇ ਰੱਖੇ ਇਸ ਸੇਵਕ ਦੀ ਕਾਰਜ ਰਾਸ ਕੇ ਕਾਰਜ ਰਾਸ ਉਹਦੇ ਕਾਰਜ ਰਾਸ ਨਾ ਸ਼ਰਤਾਂ ਜਿਹੜਾ ਸ਼ਰਤਾਂ ਪੂਰੀਆਂ ਕਰ ਉਹਦਾ ਕਾਰਜ ਰਾਸ ਬਦੂਆ ਸਾਹਿਬ ਕਹਿੰਦੀ ਹੈ ਅਗਰਾਂ ਦੇ ਸੇਵਾ ਕਰ ਤੋਂ ਹੋਏ ਨੇ ਕੋ ਹੋ ਤੋ ਪ੍ਰਾਪਤ ਸੁਆਮੀ ਇੱਕ ਦੀ ਗੱਲ ਸੇਵਾ ਕਰ ਤੋਂ ਹੋਏ ਨੇ ਕੰਮ ਇਸ ਸੇਵਾ ਕਰਦਾ ਕੋਈ ਕਾਬਿਲ ਨਾ ਹੋਵੇ ਸੇਵਾ ਦੇ ਵਿੱਚ ਤਿਸ ਕੋ ਹੋ ਤੋ ਪ੍ਰਾਪਤ ਸੁਆਮੀ शब्द गुरु प्राप्त हो जाते सेवा वाले जो निकल다 फिरो शब्द गुरु और ही होनदर काम वाले काम ਤੇ काम वाले रिश्ते पदो से जे काम में सामने के अधीन रहे फिर दी भगवत पर तो बस इतना आगे फर्क सीगा पांचवे ਉਹਨਾਂ ਦੇ ਵਿੱਚ ਕਾਮਨਾ ਸੀ ਕਿ ਉਹ ਰਹੀ ਦੀ ਇਹਨਾਂ ਵਿੱਚ ਕਾਮਨਾ ਹੋਇਉ ਨਹੀਂ ਸੀ ਕੋਈ ਤੇthia ਜੀ ਕਾਮਨਾ ਹੋ ਰਹੀ ਨਹੀਂ ਸੀ ਮੈਨੂੰ ਮਿਲਣੀ ਚਾਹੀਦੀ ਹੈ ਇਹ ਕਾਮਨਾ ਰੱਖ ਕੇ ਉਹ ਪੜ ਰਹੀ ਸੀ ਸੁਣ ਰਹੀ ਸੀ ਸਮਝ ਰਹੀ ਸੀ ਮਨ ਵੇਚਿਆ ਹੋਇਆ ਨਹੀਂ ਸੀ ਜਵਾਬ ਵੀ ਕਰ ਦਿੰਦੇ ਸੀ ਕੋਈ ਨਾ ਦੋ ਭਰਾ ਪਹਿਲਾ ਨੇ ਆ हड ਹੱਡ है ਐ ਸਾਡੇ ਕਰਜ ਕੋ ਰਿਆ ਮੈਨੂੰ ਗਮਲ ਕੀ ਉਹਨਾਂ ਨੂੰ ਕਿਉਂ ਨਹੀਂ ਵਧੀ ਗੱਲ ਆ ਦੱਸੀ ਐਸ ਪਦੇ ਦੇ ਵਿੱਚ ਐ ਦੋਨਾਂ ਭਰਾਵਾਂ ਦੇ ਵਿੱਚ ਸੱਚੀ ਗੱਲ ਸਤਬੋਧ ਦੀ ਚਲਦੀ ਐ ਮੈਨੂੰ ਸਤਬੋਧ ਦੀ ਪਦਵੀ ਕਿਉਂ ਮਿਲ ਗਈ ਉਹਨਾਂ ਨੂੰ ਕਿਉਂ ਦੀ ਬਣੀ ਐ ਉਹਦੀ ਆਤਮ ਜੇ ਕਿ ਲੱਗੀ ਜੀ ਜਾਂਦੇ ਤੇ ਦਸ ਦਸ ਨਾਲ ਵੀ ਲੱਗੀ ਵਿੱਚ ਸਾਰਿਆਂ ਨਾਲ ਲੱਗੀ ਉੱਥੇ ਤਾਂ ਇੱਥੇ ਹੋਰ ਗੱਲ ਹੈ ਇਹ ਪਹਿਲੀ ਗੱਲ ਹੈ ਜੇ ਸੱਗੇ ਭਾਜ ਨੂੰ ਗੱਡੀ ਮਿਲਣੀ ਹੈ ਪਹਿਲਾ ਚਾਂਸ ਹੈ ਜੇ ਸੱਗੇ ਭਾਜ ਗੱਡੀ ਮਿਲਣੀ ਹੈ ਇਸਕੇ ਕੰਪੈਰੀਟਿਵਲੀ ਇਸੀ ਗੱਡੀ ਕਿਹਨੂੰ ਮਿਲਣੀ ਹੈ ਕੋਪੀਟਿਸ਼ਨ ਸਿਖੀ ਉੱਥੇ ਕੰਪਲਟੀ ਜੱਦੀ ਸੀ ਉੱਥੇ ਤਾਂ ਹੱਕ ਦੀ ਉਹ ਕਹਿੰਦਾ ਮੇਰਾ ਵਾਅਦਾ ਮੇਰੀ ਹੋ ਗਈ ਠੀਕ ਹੈ ਉਥੇ ਦਾ ਬਾਪ ਜੀ ਜਿਹਦਾ ਬਾਪ ਹੋਗਾ ਉਹ ਮੇਰੀ ਦਈਆ ਅਸੀਂ ਬਾਰਸੇ ਸੀ ਹੁੰਦਾ ਉੱਥੇ ਤਾਂ ਹੋਰ ਸੀ ਉਥੇ ਤਾਂ ਹੀ ਕਰ ਛੱਡਣਾ ਪਿਆ ਤੇ ਕਰ ਨਹੀਂ ਛੱਡਿਆ ਹਰ ਇੱਕੋ ਹੀ ਹੈ ਹਰ ਕੋਈ ਇਕੱਠੇ ਹੀ ਨੇ ਅੱਡ ਘਰੋਂ ਹੋ ਗਏ ਮੈਂ ਤਾਂ ਉੱਥੇ ਉਪਰ ਸਾਤਾ ਨਹੀਂ ਗੱਡਿਆ ਚੌਥੇ ਪਾਸ਼ਾ ਕੋ ਰਾਮਦਾਸ ਨੇ ਚੱਕ ਰਾਮਦਾਸ ਹੈ ਘਰ ਕੋਈ ਹੈ ਉੱਥੇ ਰਹਿੰਦੇ ਨੇ ਜਦੋਂ ਕਹਿੰਦੇ ਵੰਡ ਲਈ ਅੱਡ ਹੋ ਜੀ ਜਗ ਨੌਰਾ ਪਿਆ ਫਿਰ ਫਿਰ ਉਹ ਕਹੇ ਕੱਢਿਆ ਗਿਆ ਉਹਨੂੰ ਮਿੱਤਰ ਸਾਹੇ ਕੋਲ ਜਿਵੇਂ ਉਹਨਾਂ ਨੇ ਕੱਢਿਆ ਸੀ ਉਹਨੇ ਕੱਢਿਆ ਪਰ ਖੋਹਿਆ ਗਿਆ ਪ੍ਰਾਪਰਟੀ ਦੀ ਵੰਡ ਪਾਸ ਹੋ ਦੋ ਇੱਕ ਵਾਜ਼ੇ ਹੋ ਗਏ ਕਿਉਂਕਿ ਵਾਰਸਤਾ ਸਾਡੇ ਤੇ ਇੱਕ ਚੰਗੀ ਕਹਿਤਾ ਸਕਦੇ ਨਹੀਂ ਸੀ ਉੱਥੇ ਮੌਕੇ ਮਾਲਕ ਹੈ ਉਸਕੇ ਕਾਨੂੰਨੀ ਤੌਰ ਤੇ ਜਗ੍ਹਾ ਤੇ ਕੱਦੇ ਮਾ ਉਹਨਾਂ ਪਿਆ ਇੱਥੇ ਤਾਂਗੜਾਂ ਪਿਆ ਦੋ ਇੱਕ ਪਾਸੇ ਹੋ ਗਏ ਵੀ ਤੁਸੀਂ ਉਹ ਇਸ ਹਾਲਾ ਨੂੰ ਹੱਲ ਨਹੀਂ ਕਰਦੇ ਹਾਂਜੀ ਸੇਵਾ ਕਰਦ ਹੋਏ ਨੇ ਕੰਮ ਹੀ ਜਿਸ ਕੋ ਬਹੁਤ ਪ੍ਰਾਪਤ ਸਵਾਮੀ ਸੇਵਾ ਕਰ ਤੋਂ ਨਿਕਾਮੀ ਸੇਵਾ ਕਰਦਾ ਰਹੇ ਕਾਮਨਾ ਕੋਈ ਨਾ ਰੱਖੇ ਤਾਂ ਸਵਾਮੀ ਪ੍ਰਾਪਤ ਹੁੰਦਾ ਤਾਂ ਸ਼ਬਦ ਗੁਰੂ ਨਾਲ ਸੰਪਰਕ ਜੁੜਦਾ ਨਹੀਂ ਜੁੜਦਾ ਵੀ ਆਪਣੀ ਕਿਰਪਾ ਜਿਸ ਆਪ ਕਰੇ ਨਾਮਿਤ ਸੋ ਸੇਵਕ ਗੁਰ ਕੀ ਬਤਲੇ ਆਪਣੇ ਕਿਰਪਾ ਜਿਸ ਆਪ ਕਰੇ ਆਪਣੀ ਕਿਰਪਾ अपने आप दे अपनी कृपा करे अपनी अंतरात्मा अपने आप से अपने भक्ते कृपा करे जे अपने अंतरात्मा अपना प्रभु अपने भक्ते कृपा करे जे मानु सहाल लेवे मानदेव को दूर कर लेवे मानु जन्म जाल च बचा लेवे बांटा धर्म दूर कर लेवे मन विचो लोभ त्याग देवे मन विचो अहंकार दूर कर लेवे ਆਗਦੇ ਸੂਬੇ ਕੋ ਮਨਸੇਬ ਕੋ ਮਨਸੇਬ ਬਣਦਾ ਤਾਵਨ ਸੇਬ ਕੋ ਬਣ ਕੇ ਗੁਰਤੀ ਬਤ ਲੰਦਾ ਨਹੀਂ ਮਨ ਲੱਗਦਾ ਹੀ ਨੀ ਹੁੰਦਾ ਅਸਲ ਜੰਤਰਾ ਅਸਾਂਝ ਹੋਟ ਹੈ ਇਸੇ ਨੂੰ ਜੰਮਣ ਵਾਲਾ ਅੰਤਰਾਸਵਾ ਹੈ ਅਸਰਾਤਾਂ ਦਾ ਜੇ ਮਨ ਜੇ ਅੰਤਰਾਸਵਾ ਦੇ ਵਿੱਚੇ ਨਹੀਂ ਛੁੱਟਣ ਦੀ ਇੱਛਾ ਤੂੰ ਫਿਰ ਮੰਨਦਾ ਹੈ ਉਹਦਾ ਨ ਕੀ ਬਣਦਾ ਮੇਰੇ ਉੱਛਾ ਨਹੀਂ ਮੇਰੇ ਅੰਦਰ ਇੱਛਾ ਨਹੀਂ ਹੈ ਸਿੱਖੀ ਦੀ ਮੇਰੇ ਮੰਦੇ ਅੰਦਰ ਇੱਛਾ ਕਿੱਥੋਂ ਪੈਦਾ ਹੋਵੇ ਜੇਰੇ ਅੰਦਰ ਇੱਛਾ ਮੇਰੇ ਮੰਦੇ ਅੰਦਰ ਵਿੱਚ ਕੋਈ ਹੋਵੇ ਜਾਂ ਮੇਰਾ ਮੇਰੀ ਮਰਜ਼ੀ ਦੀ ਨਾ ਅਗਲਦੀ ਮਰਜ਼ੀ ਹੋਣੀ ਹੈ ਨਾ ਮੰਦੀ ਮਰਜ਼ੀ ਹੋਣੀ ਹੈ ਨਾ ਅਕਲ ਨਾਲ ਤਾ ਤੋੜਨਾ ਦੁਨੀਆਂ ਨਾਲ ਨਾ ਮੰਦੀ ਕਰਨ ਉਹ ਤਾਂ ਜਾਣੇ ਹੀ ਨਹੀਂ ਸ਼ੱਕੀ ਤੌਰ ਤੇ ਗੱਦੀ ਹਟਾਉਣ ਦੀ ਗੱਲ ਜਲਦੀ ਸੀ ਸੰਪਰਕ ਰੱਖਿਆ ਦੂਜਿਆਂ ਸਾਰਿਆਂ ਨਾਲ ਸਰਕਾਰ ਨਾਲ ਸੰਗਤ ਨਾਲ ਸੰਪਰਕ ਰੱਖਿਆ ਸੰਗਤ ਤੇ ਜ਼ਰੂਰ ਰਹਿੰਦੀ ਸੀ ਬਾਡੀ ਹੁੰਦੀ ਹੋਣਾ ਸੰਗਤ ਜਿਆਦਾ ਮਾੜ ਕੇ ਰੱਖਦੇ ਸੀ ਤੂਏ ਸੰਗਤ ਉਹਨਾਂ ਦੀ ਆਵਾਜ਼ ਉਠਾਉਂਦੀ ਸੀ ਇਹਨਾਂ ਨੂੰ ਗੱਦੀ ਮਣੀ ਚਾਹੀਦੀ ਹੈ ਲੈਕ ਨੇ ਬਹੁਤ ਪਹਿਲਾਂ ਹੀ ਦਾ ਲੇਬਲਾਂ ਹੁੰਦੇ ਤੇ ਪਹਿਲਾਂ ਹੀ ਸੰਗਤ ਉਹਨਾਂ ਦੇ ਆਲੇ ਦੁਆਲੇ ਕੇ ਰੱਖੀ ਸੀ ਚੁਗਲ ਪਰ ਹਾਂ ਚੁਗਲ ਜਿਹੜੇ ਬੰਦੇ ਸੀ ਉਹ ਪਹਿਲੇ ਕੇ ਰਹਿ ਜਿਹੜੇ ਸੀ ਔਰ ਦੇ ਮੁੰਡੇ ਹੁੰਦੇ ਤਾਂ ਉਹ ਧੜੇ ਨਹੀਂ ਬਣਾਉਂਦੇ ਉਹ ਕਹਿੰਦੇ ਰੇਡੂ ਬਣਾਉਣਾ ਬੈਠੂ ੜੋੜਾ ਜੇ ਸਾੜੇ ਤੇ ਵੀ ਤਾਂ ਉਹ ਪਾਈ ਸੀ ਗਈ ਦੇ ਅੰਦਰ ਕੜਾਣ ਦੇ ਲੇ ਮੁੰਡੇ ਵਿਆਹ ਕਰ ਇਹਨਾਂ ਨੂੰ ਆਵੇ ਆਊਗਾ ਤਾਂ ਧੜਾ ਮੇਰਾ ਬਣੂਗਾ ਉਹ ਆਉਂਦਾ ਰਹਿਦਾ ਹੋ ਕੁੜੀ ਦਾ ਮੁੰਡੀ ਭੈਣ ਦਾ ਉਹ ਹਾਲਾਂਕਿ ਉਹਦੇ ਕਰਦੇ ਕੋਈ ਲਾਣਾ ਨਹੀਂ ਨਿਕਲ ਪੋਣੇ ਵਾਲੇ ਪਾਰ ਹੈ ਉਹਨਾਂ ਦੇ ਕਾਸੀ ਕੋਈ ਐਸੀ ਗੱਲ ਨਹੀਂ ਪੋਣੇ ਵਾਲੇ ਪਾਰ ਹੈ ਕੋਪਰੇ ਤੋਂ ਕੀ ਹੋਵੇ ਆਪਣੇ ਨਾਮ ਲੱਗਿਆ ਹੈ ਕਰਦੇ ਹੀ ਹੁੰਦੇ ਨੇ